शलोक मोहल्ला तीजा पराई अमान रखी पराई क्यों रखी है दितती ही सुख होए गुर का शब्द गुरु ठह टिका और थे प्रगट ना होए देखो जेड़े त्रकुड्डी ने विच कहंदे ने ना दस गुरुओं के उत्ते सुनदे ने शब्द बिल्कुल इते क्लियर करती गल पहली ता गल क्यों रखी है ਦੇਦੀ ਆਪਣੇ ਤੋਂ ਮਰਦ ਤੋਂ ਪਰਾਈ ਆਪਾਂ ਨੂੰ ਖਾਂਗਾ ਦੀ ਰਾਖੀ ਹੈ ਉਹਦੀ ਉਹ ਰੱਖੀ ਹੈ ਕਿਉਂ ਉਹ ਹੈ ਆਪਣੇ ਬਹਾਲੇ ਸ਼ਰੀਰ ਵਾਸਤੇ ਤੇ ਆਪਣਾ ਨਹੀਂ ਪਰਾਈ ਹੈ ਭਾਈ ਇਹ ਰਖੜੀ ਇਹਨੂੰ ਪਾਉਣਾ ਵੀ ਹੁੰਦਾ ਬੰਨਣਾ ਇਹਨੂੰ ਬੰਨ੍ਹਦੇ ਦੀ ਦੇਣਾ ਇਹ ਬੰਦੇ ਵਿੱਚ ਜਿਹੜੀ ਗਲਤ ਹਾੜ ਕਰਦੀ ਹੈ ਗਲਤ ਹੈ ਰੱਖੀ ਹੈ ਦਿੱਤੀ ਉਸ ਕੋਈ ਸੁਖਦਾ ਤੇ ਇੜਚੇ ਪਰਾਂਦੀ ਪਰਾਈ ਆਮਤ ਇਹ ਰਹਿਣਾ ਦੀ ਫੇਰ ਬਹੁਤਾ ਚਿਹਰਾ ਬੋਲਦਾ ਜਦ ਮਰਦੀ ਅਗਲਾ ਮੰਗਲ ਦੇ ਅਲੀ ਦਾ ਗੱਲ ਲੇਕ ਹੈ। ਫਰਾਈ ਅਮਾਨ ਕਿਉਂ ਰੱਖੀ ਹੈ ਦਿੱਤੀ ਹੀ ਸੁਖ ਹੋਏ। ਫਿਰ ਸੁਖ ਦੀ ਦੀ ਸਉਗਾ। ਜਿਹੜਾ ਗੁਰਤਾ ਸ਼ਬਦ ਹੈ ਲੋ ਜਿਹਨੂੰ ਕਹਿੰਦੇ ਨੇ ਨਾਲ ਸੁਣਦੇ ਸਾਨੂੰ ਸ਼ਬਦ ਸੁਣਦੇ ਨੇ ਉਹ ਕਹਿੰਦੇ ਨੇ ਪੰਜ ਸ਼ਬਦ ਸੁਣਦੇ ਨੇ ਪੰਜ ਸ਼ਬਦ ਹੈ ਪੰਜ ਲਾਭ ਸੁਪਰੀਵ ਨੂੰ ਕਹਿੰਦੇ ਨੇ। ਅਨਾਦ ਸ਼ਬਦ ਨੂੰ ਕਹਿੰਦੇ ਨੇ ਅਨਾਦ ਬਾਜ। ਤੇ ਗੁਰਤਾ ਸ਼ਬਦ ਗੁਰਥੈ ਟਕੈ। ਜੇ ਗੁਰਕਾ ਸ਼ਬਦ ਜਿਹੜਾ ਹੈਗਾ ਉਹ ਕਿੱਥੇ ਹੁੰਦਾ ਜੇ ਗੁਰ ਸਤਗੁਰ ਦੇ ਚਰਨਾਂ ਜਿੱਥੇ ਕੇ ਤਾਂ ਉੱਥੇ ਹੁੰਦਾ ਉਹ ਜੇ ਵਾਂਗ ਹੋਰ ਕਿਤੇ ਟਿਕਾਈਏ ਉੱਥੇ ਨਹੀਂ ਸੁਣਨਾ ਗੁਰਕਾ ਸ਼ਬਦ ਉੱਥੇ ਕੁਝ ਹੋਰ ਹੀ ਸੁਣੂਗਾ ਕਿਹੜਾ ਉੱਥੇ ਹੀ ਪ੍ਰਗਟ ਹੁੰਦਾ ਹੋਰ ਥਾਂ ਪ੍ਰਗਟਨਾ ਹੋਏ ਹੋਰ ਕਿਤੇ ਉਹ ਪ੍ਰਗਟ ਹੁੰਦਾ ਹੀ ਨਹੀਂ ਤੇ ਕੁਟੀ ਕਿਟੀ ਉთა ਪ੍ਰਗਟ ਜਿੱਤੇ ਸਤਗੁਰਾ ਉਹਦੇ ਚਰਨਾਂ ਜੇ ਅਰੇ ਇਹ ਆਪਾਂ ਚਰਨਾ ਨਾਲ ਜੁੜੀਏ ਉੱਥੇ ਹੀ ਮੰਨ ਹੀ ਸੁਣਦਾ ਹੁੰਦਾ ਹੋਰ ਕਿਤੇ ਸੁਣਦਾ ਹੀ ਨਹੀਂ ਉੱਥਾ ਪ੍ਰਗਟੇ ਵੀ ਹੁੰਦਾ ਹੋਰ ਕਿਤੇ ਜਿਹੜੇ ਤਰਖੰਡੀ ਦੇ ਵਿੱਚ ਸ਼ਬਦਾਂ ਦੇ ਪ੍ਰਗਟ ਕਰਨ ਦੀ ਸੁਣਦੀ ਗੱਲ ਕਰਦੇ ਨੇ ਉਹ ਬਜ਼ੂਰ ਅਗਰ ਕਾ ਸ਼ਬਦੇ ਦੀ ਕੁਝ ਹੋ ਰਿਹਾ ਉਹ ਹਾਂਜੀ ਇਹ ਤਾਂ ਹੀ ਫੈਸਲਾ ਸਾਹਿਬ ਤੇ ਲਿਖਿਆ ਜੀ ਮੰਨ ਗੁਰਮਿਲ ਕਾ ਸਵਾਰੇ ਹਾਂਜੀ ਬਿਲਕੁਲ ਬਿਲਕੁਲ ਕਾਜ ਉੱਥੇ ਹੀ ਸਰਕਾਰ ਬੈਸੋ ਹਰ ਜਰ ਪਿਆਰੇ ਸਤਗੁਰ ਤੁਮਰੇ ਘਰ ਦੇ ਬਾਰੇ ਘਰ ਜੈਠੋ ਘਰ ਉਹੀ ਆ ਘਰ ਦੇ ਤੋਂ ਸ਼ਬਦ ਘਰ ਉੱਥੇ ਜਿੱਥੇ ਆਪਣੇ ਘਰ ਆਏ ਪਰ ਘਰ ਚ ਲਿਆ ਜਾਊਗਾ ਇਹ ਵੀ ਦੋ ਜਾ ਠੀਕ ਹੈ ਜੀ ਅੰਨੇ ਵਸ ਮਾਨਕ ਪਾਇਆ ਘਰੀ ਘਰੀ ਵੇਚਣ ਜਾਏ ਉਹਨਾ ਪਰਖ ਨ ਆਵਈ ਅੱਡ ਨ ਪੱਲੇ ਪਾਇ ਉਹ ਥੋੜਾ ਬਹੁਤਾ ਗਿਆਨ ਆ ਜਿਹੜੇ ਹੁੰਦੇ ਨੇ ਉਹਨਾਂ ਨੂੰ ਫਿਰ ਮਿਲ ਜਾਂਦੇ ਥੋੜੇ ਬਹੁਤੇ ਗਿਆਨ ਵਾਲਿਆਂ ਨੂੰ ਨਹੀਂ ਕਿਹਾ ਜਿਹਨੂੰ ਬਿਵੇਕ ਬੁੱਧੀ ਨਾ ਨਾ ਜਿਹਦੇ ਪੱਲੇ ਪਵੇ ਜੋ ਬਿਵੇਕ ਨਾਲ ਗਿਆਨ ਹੋਵੇ ਇਹਨਾਂ ਬਾਸ਼ਾ ਤੇ ਸਿੱਖਦਾਰਾਂ ਇੰਨਾ ਪੜਿਆ ਨੂੰ ਥੋੜਾ ਬਹੁਤਾ ਗਿਆਨ ਪੜ ਲੈਂਦੇ ਨੇ ਜਮਰ ਵਿਚਾਰ ਤਰਲ ਜਿਹਨੇ ਪੜ੍ਹਦੇ ਸਾਡੇ ਕਥਾ ਬਾਤ ਕਰ ਇੰਨਾ ਪੜਿਆ ਨਾ ਲੱਗੀ ਜਾਤ ਪਾਹ ਹੈ ਉਹ ਜੰਮ ਦੇ ਪਾਈ ਦਾ ਪਹਿਲੇ ਲੱਗੀ ਹੈ ਆਪਣੀ ਜਾਤ ਨੂੰ ਬਾਤ ਜਾਂਦੇ ਨੇ ਉਹ ਪੁੱਟਾ ਗਿਆ ਦੇ ਜਾਂਦੇ ਨੇ ਮਾਇਆ ਦੀਆਂ ਮੰਗਾ ਮੰਗਾਈ ਜਾਂਦੇ ਨੇ ਤੇ ਕਹਿੰਦੇ ਨੇ ਸੇਵਾ 도ੜੀ ਮੰਗਣ ਬਹੁਤ ਚੱਲ ਵਿਚਾਰ ਤਾਂ ਖਲਦੇ ਨਹੀਂ ਮੰਗਾ ਮੰਗਦੇ ਨੇ ਬਹੁਤ ਵੱਡੀਆਂ 5 ਰੁਪਏ ਦੇ ਕੇ 5 ਲੱਖ ਮੰਗਦੇ ਨੇ ਇਹ ਉਹਨਾਂ ਵਾਸਤੇ ਹੈ ਜਿਹੜੇ ਕੁਝ ਧਰਮ ਦਾ ਧਰਮ ਦੀ ਸਿੱਖਿਆ ਦੇ ਰਹੇ ਨੇ ਲੋਕ ਅੰਨੇ ਬਸ ਮੌਲਕ ਪਾਇਆ ਅੰਨੇ ਮੌਲਕ ਜੇ ਮਿਲ ਵੀ ਜਾਵੇ ਘਰ ਘਰ ਵੇਚਣ ਜਾਏ ਉਹ ਘਰ ਘਰ ਫਿਰਦੇ ਨੇ ਵੇਚਦੇ ਆ ਇਹ ਗੁਰੂ ਬਲੇ ਫਿਰਦੇ ਨੇ ਘਰ ਘਰ ਵੇਚੜ ਜਾਏ ਉਹਨਾਂ ਪਰਖਣਾ ਆ ਗਈ ਉਹਨਾਂ ਨੂੰ ਆਪ ਤਾਂ ਪਰਖ ਦੀ ਸੰਚਾਰ ਝੂਠੀ ਹੈ ਉਹ ਜਿਹਨਾਂ ਨੂੰ ਦੇਣਾ ਉਹਨਾਂ ਨੂੰ ਤਾਂ ਕੀ ਪਰਖਾ ਪਰਖ ਜਿਹੜੇ ਲਈ ਫਿਰਦੇ ਨੇ ਉਹਨਾਂ ਨੂੰ ਨਹੀਂ ਉਹ ਵੀ ਸੱਚ ਬੰਦੀ ਬੈਠੇ ਨੇ ਉਹ ਪਰਖਾਣੀਆਂ ਗੱਲਾਂ ਉਹਨੇ ਸਾਡੀਆਂ ਦੀਆਂ ਜੇ ਪਰਖ ਹੁੰਦੀ ਤਾਂ ਕਿਉਂ ਚਲ ਕਿਉਂ ਫੜਦੇ ਜੇ ਪਰਖ ਨਾ ਆ ਗਈ ਅੱਡਣਾ ਪੱਲੇ ਪਾਇ ਇਸੇ ਕਰਕੇ ਉਹਨਾਂ ਦੇ ਫੁੱਡੀ ਕੁੱਡੀ ਨਹੀਂ ਬੰਦੇ ਪਈ ਗਿਆ ਸੀ ਉਹ ਪੱਲੇ ਕੀ ਪੈ ਗਿਆ ਵਚਨ ਬਦੇ ਤੇ ਗੁਰੂ ਦੇ ਤੁਹਾਡੇ ਤੁਸੀਂ ਕਹਿੰਦੇ ਸਿੱਖੀ ਦਾ ਦਵਾਲਾ ਨਿਕਲ ਗਿਆ ਦਵਾਲਾ ਕਾਹਦਾ ਨਿਕਲ ਗਿਆ ਸਿੱਖੀ ਦਾ ਜੇ ਤੁਹਾਡੇ ਮਹਾਨਪੁਰਖਾਂ ਦੇ ਵਚਨ ਠੀਕ ਸੀ ਉਹਨਾਂ ਦੀ ਵਿਆਖਿਆ ਠੀਕ ਸੀ ਉਹ ਮਹਾਨਪੁਰਖਾਂ ਦੀ ਬੁੱਢੀ ਭਰੀ ਪਈ ਹੈ ਮਹਾਨਪੁਰਖਾਂ ਨੇ ਹੰਤ ਕੋਈ ਨਹੀਂ ਸਿੱਖੀ ਹੈ ਕੋਈ ਨਹੀਂ ਇਹਦੀ ਵਜ੍ਹਾ ਕੀ ਹੈ ਜਵਾਬ ਦੇ ਕੋਈ ਲੜਨ ਲੜਨ ਨੂੰ ਤਿਆਰ ਨੀ ਗੱਲ ਪੈਣ ਨੂੰ ਤਿਆਰ अड्ना पल्ले पाए पन्ने की होए ते थोड़े पल्ले दिखाओ की है किसी नहीं किसी दे आप परख ना आवे ता पारखियां परख नहीं जेड् थोड़े पल्ले प्यार ही ना कुछ न बागरू बागरू सारी जिंदगी पर ਜੇ ਆਪ ਤੈਨੂੰ ਪਰਖ ਲਈ ਸੀਗੀ ਵੀ ਇਹ ਜੋ ਮੈਨੂੰ ਪੱਲੇ ਨਹੀਂ ਕੁਝ ਪਿਆ ਪਰਖਾ ਲੈਂਦਾ ਪਾਰਕੀਆਂ ਕੋਲੋਂ ਪਰਖਾ ਲੈਂਦਾ ਜਾ ਕੇ ਹੋਰ ਤਾਹੂ ਕਿਸੇ ਤੇ ਪੁੱਛ ਲੈਂਦਾ ਵੀ ਇੰਨਾ ਚਿਰ ਹੋ ਗਿਆ ਮੈਨੂੰ ਬਾਗੂ ਵਾਰੂ ਕਰਦੇ ਮੇਰੇ ਪੱਲੇ ਕਿਉਂ ਨਹੀਂ ਕੁਝ ਪਿਆ ਫਿਰ ਤੈਨੂੰ ਪਰਖੂ ਦੱਸ ਦਿੰਦਾ ਭਾਈ ਕਿਉਂ ਨਹੀਂ ਪਿਆ ਦਾ ਤਾਂ ਕਿਸੇ ਤੇ ਪਰਖਾਇਆ ਆਹ ਤੇਰੀ ਸਾਰੀ ਜ਼ਿੰਦਗੀ ਲੰਗੀ ਉਹ ਤੂੰ ਕਹਿ ਰਿਹਾ ਮੈਂ 88 ਸਾਲ ਦਾ ਹੋ ਗਿਆ ਮੈਨੂੰ ਮਿਲਿਆ ਕੁਝ ਵੀ ਨਹੀਂ ਤੇਰੀ ਤਾਂ ਜ਼ਿੰਦਗੀ ਨਾਲ ਤੂੰ ਪਰਖਾਇਆ ਕਿਉਂ ਦੀ ਤੁਸੀਂ ਬਾਹਰ ਉਹਨਾਂ ਨੂੰ ਕਹਿੰਦੇ ਵਾਗਰੂ ਵਾਗਰੂ ਚੱਪੋ ਤੈਨੂੰ ਕੁਝ ਮਿਲਿਆ ਕੋਈ ਨਹੀਂ ਤੈਨੂੰ ਕੱਲ ਕੁਝ ਮਿਲਿਆ ਨਹੀਂ ਤੈਨੂੰ ਪਰਖ ਨਹੀਂ ਹੈ ਕਿ ਕਿਉਂ ਨਹੀਂ ਮਿਲਿਆ ਤਾਂ ਕਿਸੇ ਪਰਖੋਂ ਪਰ ਚਰਿਆ ਜਾ ਉਹ ਤਾਂ ਠੀਕ ਹੈ ਜਾਂ ਗਲਤ ਹੈ ਹਾਂਜੀ ਜਿਵੇਂਸ ਨਾਲ ਚਿੱਤ ਲਾਹੇ ਨਾਲ ਚਿੱਤ ਜਿੱਦੈ ਚਿੱਤ ਆਪਣੇ ਮੂਹ ਨਾਲ ਜੀਣਾ ਚਿੱਤ ਲਾਇਆ ਸਭ ਕੁਝ ਤੈਨੂੰ ਪ੍ਰਤੀਤ ਹੋਵੇ ਬੋਲਣਾ ਤਾਂ ਤੂੰ ਜੁੜਿਆ ਹੀ ਨਹੀਂ ਇੱਕ ਤਾਂ ਹੋਇਆ ਹੀ ਨਹੀਂ ਦੀ ਗਿਆਨਕ ਇਹ ਵੀ ਦੀ ਹਰ ਪਜੋ ਇੱਕ ਮੰਨ ਹੋਇ ਇੱਕ ਚਿੱਤ ਵੀ ਦੀ ਤਾਂ ਆ ਸੀ ਇਹ ਤਾਂ ਵੀ ਦੀ ਆਪਣਾ ਹੀ ਕੋਈ ਨਹੀਂ ਬਣ ਕੇ ਵੈਗਰੂ ਵੈਗਰੂ ਆ ਮਾੜਾ ਹੱਥ ਚ ਕਾਇਰਾ ਮਾੜਾ ਤਾਂ ਕਰਵੇਂ ਫਿਰ ਮਾੜਾ ਹੱਥ ਜੇ ਫਰੀ ਜਾਂਦੀ ਹੈ ਜਿਹੜਾ ਰਾਮ ਬੋਲਦਾ ਤੇ ਬੋਲਦੀ ਹੈ ਜੀਬ ਫਰੇ ਮੁਖ ਬਾਹੇ ਕਾਇਰ ਵੈਗਰੂ ਬੋਲਦੀ ਹੈ ਜਾਂ ਰਾਮ ਬੋਲਦੀ ਹੈ ਉਹ ਤਾਂ ਮੂੰਹ ਚ ਫਿਰਦੀ ਹੈ ਨੋ ਜੇ ਲੋ ਮੈਂ ਬਣਪਨ થી ਦਾ 10 ਬਰੇ ਇਹ ਤਾਂ ਸਮਝਣਾ ਹੈ ਇਹ ਤਾਂ ਸਧਾਰਨ ਲੋਕ ਵੀ ਇਹਨਾਂ ਨੇ ਤਾਂ ਸਮਝ ਨੂੰ ਇਹਨੂੰ ਤਾਂ ਸਮਝਣੀ ਬੰਦੇ ਆ ਤੁਸੀਂ ਕਿਵੇਂ ਬੰਦ ਲਿਆ ਇਹ ਤਾਂ ਸਧਾਰਨ ਕਵੀਆਂ ਨੇ ਵੀ ਲੱੜਦੀ ਗੱਲ ਗੁਰਵਾੜੀ ਨੇ ਵੀ ਤਾਂ ਨਹੀਂ ਜੀ ਭਾਵੇਂ ਹੋਰ ਬਹੁਤ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਦੀ ਬੰਦੇ ਇਹ ਕਰਕੇ ਧਰਮ ਤੋਂ ਲੋਕ ਬੰਦੀ ਹੋ ਗਏ ਇੰਟੈਲੀਜੈਂਟ ਬੰਦੇ ਜਿਹੜੇ ਤੁਸੀਂ ਪਾਰਖਮਾ ਕੋਲ ਪਰਖਾਇਆ ਦੀ ਆਪਣੀ ਜਿੱਤ ਛੱਡੀ ਦੀ ਜੇ ਉਸ ਨਾਲ ਜਿੱਤ ਲਾਇ ਤਾਂ ਵਥ ਲਹ ਤਾਂ ਕੋਈ ਪੱਲੇ ਪੈਂਦਾ ਤਾਂ ਵਥ ਲਹ ਤਾਂ ਵਸਤੂ ਮਿਲਦੀ ਹੈ ਨਾਉ ਨੇ ਜਿੱ ਪੱਲੇ ਪਾਇ ਫੇਰ ਨਮ ਖਜ਼ਾਨਾ ਮਿਲਦਾ ਨਾਉ ਦਿੱਦੀ ਕਰ ਦੇਣਗੇ ਜੇ ਆਪੇ ਦਿੱਦੀਆਂ ਕਿ ਕੋਈ ਤੁਸੀਂ ਚਾਹ ਤੁਸੀਂ ਵੀ ਕਰਤੀ ਉਹ ਦਿੱਦੀ ਇੱਕ ਵਚਨ ਹੈ ਥਿਆਰੀ ਲਾ ਕੇ ਔਰ ਨਾਉ ਨਵਾਂ ਖਜ਼ਾਨਾ ਨਾਉ ਦਾ ਮਤਲਬ ਝੂ ਦੋਨੋਂ ਵੀ ਉੱਪਰ ਹਾਂਜੀ ਇਕ ਵਚਨ ਨਦੀ ਨੂੰ ਵੀ ਸਿਆਰੀ ਇਕ ਵਚਨ ਇਹਦੇ ਲੋਨ ਦਾ ਦਾ ਨਾਈਟ ਕਰਦਾ ਦੀਦੀ ਨਾਲ ਦੀਦੀਆਂ ਮੁਹਬਤ ਜਨ ਕਰਦਾ ਉਹ ਵੀ ਨਟੇ ਮ ਕਰ ਦਿੰਦੇ ਅਕਾ ਮੀਟਿਕ ਕਰੀ ਜਾਂਦੇ ਨੇ ਤੇ ਕਹੋ ਫਿਰ ਚੁਪ ਕਰ ਜਾਂਦੇ ਨੇ ਠੀਕ ਖਜ਼ਾਨਾ ਪੱਲੇ ਪੈਂਦਾ ਗੁਰਬਾਨੀ ਚ ਨਵਾਂ ਖਜ਼ਾਨਾ ਹੈ ਜੇ ਸਮਝਉਂਦੀ ਹੈ ਤਾਂ ਦਵੀਓ ਗੱਲ ਹੈ ਇਹਦੇ ਅਰਥ ਪਲਟਾਏ ਹੋਏ ਨੇ ਅਰਥ ਪਲਟਾ ਕੇ ਪ੍ਰਾਣੀ ਬਣਾਤਾ ਇਹਨੂੰ ਸੱਚ ਕੋਈ ਨਾ ਪਰਾਨੇ ਆਲਾ ਉਹੀ ਜਪ ਪਰਾਨੇ ਵਾਲਾ ਉਹੀ ਜਪ ਪਰਾਨੇ ਵਾਲਾ ਇਹਨੂੰ ਪ੍ਰਾਣਾ ਬਣਾਤਾ ਨਵੇਂ ਨੂੰ ਸਭ ਕੁਝ ਨਵੇਂ ਹਾਂਜੀ ਘਰੀ ਹੁੰਦੇ ਧਨ ਜਗ ਭੁੱਖਾ ਮੂਵਾ ਬਿਨ ਸਤਗੁਰ ਸੋਜੀ ਨਾ ਹੋਏ ਸਬਦ ਸੀਤਲ ਮਨ ਤਨ ਵਸੈ ਤਿੱਥੈ ਸੋਗ ਨਾ ਕੋਈ ਹਰ ਹੁੰਦੇ ਧਨ ਧੰਦਾ ਹੋਵੇ ਘਰ ਚ ਗੱਡਿਆ ਹੋਇਆ ਆਪਣੇ ਥੱਲੇ ਜਗ ਭੁੱਖਾ ਗੁਆ ਜਗ ਦਾ ਭੁੱਖਾ ਮਰਦਾ ਕਾਰਨ ਕੀ ਹੈ ਜਾਂ ਕਿਸੇ ਨੇ ਦੱਸਿਆ ਨਹੀਂ ਜੇ ਦੱਸਿਆ ਅੰਦਰ ਫਿਰ ਉਹਨਾਂ ਨੇ ਲਪਕੇ ਨਹੀਂ ਦਿੱਤਾ ਕਿਸੇ ਨੂੰ ਵਿਸ਼ਵਾਸ ਨਹੀਂ ਆ ਇਸ ਗੱਲ ਤੇ ਅੰਦਰ ਅੰਦਰ ਹੈ ਵਰਬਾਂਲੀਆ ਨੇ ਗੁਰੂਆਂ ਦੀ ਭਗਤਾਂ ਦੀ ਕੱਢ ਕੇ ਬਾਹਰ ਦੱਸਿਆ ਉਹਨਾਂ ਦੀ ਗੱਲ ਨੂੰ ਦੂਜਿਆਂ ਨੇ ਨਹੀਂ ਦੂਜਿਆਂ ਨੇ ਰੱਤ ਕਰਤਾ ਮੂਰਤੀ ਪੂਜਾ ਕਰਤੀ ਬਾਹਰੋਂ ਮਿਲਦਾ ਅੱਖਾਂ ਨਾਲ ਵੀ ਨਾ ਉਹ ਕਸ ਪਲਟਾਤਾ ਉਸ ਗੱਲ ਨੂੰ ਤਾਂ ਹੀ ਕੋ ਖਾਣ ਜਗਰ ਉਹ ਕਿਹਾ ਭੁੱਖਾ ਨਾ ਉਤਰਿਆ ਕਰ ਹੁੰਦੇ ਤਾਂ ਜੋਗਧਨ ਕਰਚਾ ਅੰਦਰ ਲੋਹ ਦੇ ਦੇਮ ਪ੍ਰਭ ਕਾ ਨਾਮ ਦੇਹੀ ਵਿੱਚ ਕਾ ਤੇ ਸਰਾਨਮ ਫਿਰ ਜਦ ਤੋਂ ਭੁੱਖਾ ਬੂਆ ਫਿਰ ਸਾਧਗੁਰ ਸੋਚੀ ਨਾ ਹੋਏ ਸੱਚ ਦਾ ਧਿਆਨ ਵੀ ਨਾ ਹੈ ਕਿ ਜੈਦੂ ਸਾਧਗੁਰ ਹੋਵੇ ਤਾਂ ਸੋਚੀ ਤਵੇ ਸਾਰੇ ਨੂੰ ਸਮਝ ਦਵੇ ਸਾਧਗੁਰ ਕੋਈ ਹੈ ਨਹੀਂ ਗੁਰੂ ਦਾ ਦੇਖੋ ਸਾਧਗੁਰ ਛੋਟਾ ਹੁੰਦਾ ਗੁਰੂ ਬੜਾ ਹੁੰਦਾ ਗੁਰੂ ਦਾ ਸਰ ਭਰਿਆ ਤਾਂ ਸਾਧਗੁਰ ਕੋਈ ਨਹੀਂ ਗੁਰੂ ਬਣੇ ਨੇ ਸਤਿਗੁਰ ਵੀ ਕੋਈ ਬਣਿਆ ਗੁਰੂ ਕੋਈ ਸਤਿਗੁਰ ਛੋਟਾ ਹੁੰਦਾ ਲੋ ਸੱਚ ਦਾ ਗਿਆਨ ਜਾਣਨ ਵਾਲਾ ਸਤਿਗੁਰ ਹੁੰਦਾ ਸੱਚ ਦਾ ਗਿਆਨ ਮਿਲਿਆ ਨਹੀਂ ਤੇ ਅੰਦਰੋਂ ਤਾਂ ਲੱਭਿਆ ਨਹੀਂ ਖਜ਼ਾਨਾ ਅੰਦਰ ਹੀ ਹੈ ਉਹ ਦਾਦੇ ਦਾ ਡੱਡਾ ਖੋਲ ਖਜ਼ਾਨਾ ਉਹ ਤਾਂ ਅੰਦਰ ਹੀ ਹੈ ਇਸ ਕਰਕੇ ਭੁੱਖਾ ਬੂਹਾ ਸ਼ਬਦ ਚੀਤਲ ਬਣ ਕਨਵਸ ਹੈ ਜਿਹੜਾ ਸ਼ਬਦ ਹੈ ਗੁਰਬਾਣੀ ਦਾ ਬੁਦੇਸ ਹੈ ਇਹ ਤਨਮਨ ਨੂੰ ਸ਼ੀਤਲ ਕਰ ਦੇਣ ਵਾਲਾ ਠੰਡਾ ਕਰ ਦੇਣ ਵਾਲਾ ਸ਼ਾਂਤ ਕਰ ਦੇਣ ਵਾਲਾ ਜੇ ਅੰਦਰ ਵੱਸ ਜਵੇ ਕਹੇ ਤੇ ਫਿਰ ਉਹ ਸਿਰ ਬਿੱਤੇ ਤਾਂ ਸੋਗ ਬਿਜੋਗ ਨ ਹੋਇਓ ਉਤੇ ਕੋਈ ਉਤੇ ਕੋਈ ਸੋਗਰ ਬਿਜੋਗ ਦਾ ਕੋਈ ਅਸਰ ਨਹੀਂ ਤਾਂ ਸੋਗ ਬਿਜੋਗ ਹੁੰਦੇ ਰਹਿਣੇ ਨੇ ਸੰਸਾਰ ਦੀ ਜ਼ਿੰਦਗੀ ਚ ਲੱਗੇ ਰਹਿਣੇ ਨੇ ਪਰ ਉਹਦੇ ਤੇ ਕੋਈ ਅਸਰ ਨਹੀਂ ਉਹਦੇ ਤੇ ਕਿਉਂ ਨਹੀਂ ਅਸਰ ਉਹਦੇ ਵਾਸਤੇ ਸੋਗ ਬਿਜੋਗ ਪਾਣੇ ਵਿਯੋਗ ਦਾ ਸੋਗ ਕੋਈ ਫਰ ਜਾਂਦਾ ਹੈ ਵਿਯੋਗ ਹੋ ਜਾਂਦਾ ਹੈ ਵਿਛੋੜਾ ਹੁੰਦਾ ਸੋਗ ਹੁੰਦਾ ਹੈ ਉਹ ਫਿਰ ਉੱਤੇ ਨਹੀਂ ਉੱਦਦਾ ਠੀਕ ਭਾੜੇ ਆਪ ਗਰਭ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੁੱਝੇ ਕਿਨੇ ਫਿਰ ਫਿਰ ਆਵਾਂ ਜਾਂ ਜਾਈ ਸੰਸਾਰ ਦੇ ਵਿੱਚ ਭਾਇਆ ਆਪਣੇ ਸਰੀਰ ਤੇ ਉਸ ਲੈ ਕੇ ਸਭ ਕੁਝ ਇਸ ਆਪਣੀ ਤਹੇ ਹੀ ਦੀ ਪ੍ਰਾਈਵੇਸੀ ਹੈ ਇਹਦੇ ਤੇ ਗਰਭ ਕਰਦਾ ਬਸ ਪ੍ਰਾਈ ਆਪ ਗਰਭ ਕਰੇ ਸਰਬ ਆਪ ਕਰਦਾ ਮੇਰਾ ਕੋਈ ਮੇਰਾ ਉਹ ਬੂਰਖਾ ਕਹਿੰਦਾ ਗਰਭ ਕਰੇ ਉਹ ਬੂਰਖਾ ਕਹਿੰਦੇ ਬੂਰਖਾ ਆਪ ਘਣਾਏ ਬੂਰਖਾ ਬਣੀ ਜਾਂਦਾ ਕਹਿੰਦਾ ਵੀ ਹੈ ਧਾਨਕ ਬਿਨ ਬੂਝੇ ਕਿਨੇ ਨਾ ਪਾਇਓ ਫਿਰ ਫੇਰ ਆਵਾਜਾਏ ਇਹ ਮੁਝਾਰਤ ਗੁਝਣੀ ਸੀ ਵੀ ਮੇਰੀ ਦੀ ਹੈ ਇਹ ਮੇਰੀ ਤੈਨੂੰ ਲੱਗਦੀ ਆ ਦੁਨੀਆ ਮੰਨਦੀ ਆ ਕਾਗਜ਼ਾਂ 'ਚ ਵੀ ਤੇਰੀ ਐ ਸਰਕਾਰ ਵੀ ਤੇਰੀ ਮੰਦੀ ਆ ਦੁਨੀਆ ਵੀ ਤੇਰੀ ਮੰਦੀ ਆ ਪਰ ਤੇਰੀ ਹੈ ਨਹੀਂ ਗੱਲ ਤੇਰੀ ਕਿਉਂ ਨਹੀਂ ਇਹ 부ਝਣ ਵਾਲੀ ਗੱਲ ਤੇਰੀ ਕਿਉਂ ਨਹੀਂ ਇਹ ਹੀ ਹੈ ਇਹ ਹੀ ਵਾਲੀ ਗੱਲ ਹੈ ਤੇਰੀ ਹੁੰਦੀ ਹੋਈ ਵੀ ਤੇਰੀ ਨਹੀਂ ਬਸ ਇਹ ਹੀ ਮੁਝਾਰਤ ਹੈ ਦਿਨ ਬੁੱਝੇ ਕਿੰਨਾ ਪਾਇਓ ਉਹਨੂੰ ਸਾਚ ਨੂੰ ਫੇਰ ਆਤਮ ਗਿਆਨ ਹੱਤ ਉਹ ਭੇਦ ਨਹੀਂ ਪਾਇਆ ਬੁਝਾਰਤ ਨਹੀਂ ਮੁਝੀ ਗਈਏ ਇਹ ਇਹ ਭੇਦ ਨਹੀਂ ਪਾਇਆ ਕਿਛੜ ਫਿਰ ਫਿਰ ਆਬ ਆ ਜਾਏ ਇਸੇ ਕਰਕੇ ਉਹ ਜਿਹੜਾ ਹੈ ਛੱਡ ਜਨਮ ਬੋਦਾ ਰਹਿੰਦਾ ਜਨਮਦਾਰ ਰਹਿੰਦਾ ਬਰਦਾਰ ਰਹਿੰਦਾ ਰਹਿੰਦਾ ਬਰਦਾਰ ਰਹਿੰਦਾ ਸੁਰਤੀ ਜਾਣ ਲੱਗੇ ਚਾਹੇ ਪਰਿਵਾਰ ਚ ਰਹਿ ਜਾਵੇ ਚਾਹੇ ਉਹ ਕਾਂਕੇ ਰਹਿ ਜਾਵੇ ਚਾਹੇ ਉਦਿ तीजा मन ਵੇ ਉਹ ਜਿਵੇਂ ਧਿਆਨ ਸੋਰਤ ਰਹਿ ਜਾਂਦੀ ਉੱਥੇ ਦੁਆ ਜਨਮ ਹੋ ਜਾਂਦਾ ਹਾਂ ਜੀ ਮਹੱਲਾ ਤੀਜਾ ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਵਿਛਣ ਕਬੂ ਜੇ ਆਪ ਬਹੁਤ ਜਗ੍ਹਾ ਤੇ ਉੱਤੇ ਉੱਤੇ ਟਿੱਟੀਆਂ ਹੁੰਦੀਆਂ ਹੀ ਨਹੀਂ ਸੀ ਪਹਿਲਾਂ ਕਿਉਂਕਿ ਉਹ ਜਗ੍ਹਾ ਹੀ ਨਹੀਂ ਸੀ ਇਹਦੀ ਮਨ ਆਨੰਦ ਪਿਆ ਹੀ ਬੋਲਾਂਗੇ ਇਹਨੂੰ ਹਾਂਜੀ ਮਿਲ ਗਿਆ ਜਦ ਬੁੱਧੀ ਨੂੰ ਮਨ ਆਨੰਦ ਹੋ ਗਿਆ ਉਹਦਾ ਦੇਖੋ ਹੋਇਆ ਮਨ ਮਾਨ ਆਨੰਦ ਬੁੱਧੀ ਨੂੰ ਪ੍ਰੀਤ ਆ ਬਿਲੇ ਸਰਥੇ ਸੱਜਣ ਸੰਤ ਪਿਆਰੇ ਜਿਹੜੇ ਸੱਜਣ ਸੰਤ ਸੀ ਜਿਹੜੇ ਮਿਲੇ ਆ ਪ੍ਰੀਤਮ ਉਹ ਵੀ ਰਸ ਉਹਨੂੰ ਵੀ ਰਸ ਆਇਆ ਸਰਸੇ ਰਸ دار ਹੋ ਗਏ ਰਸ ਤੇ ਲੇ ਹੋ ਗਏ ਸੰਤ ਪਿਆਰੇ ਬਨਵੇਂ ਸੰਤ ਹੋ ਗਿਆ ਜਾਇ ਜਹੰਦਾਲਾ ਸੰਤ ਨਹੀਂ ਹੋਏ ਸੰਤ ਬਨ ਹੋ ਗਿਆ ਸ਼ਾਂਤ ਹੋ ਗਿਆ ਸ਼ਾਂਤੀ ਹੋ ਗਈ ਸ਼ਾਂਤ ਹੋ ਗਿਆ ਬਨ ਸੰਤ ਹੋ ਗਿਆ ਸੰਤ ਹੋਣ ਦਾ ਸ਼ਾਂਤੀ ਮਿਲ ਗਈ ਉਹਨੂੰ ਕ੍ਰਿਸ਼ਨਾਂ ਦੀ ਅਗ ਬੁਝ ਗਈ ਧੂਆ ਬਨੇ ਨਿਕਲਦਾ ਤਾਂ ਸ਼ਾਂਤ ਹੋਵੇ ਪਿਆਰੇ ਦੋਈ ਸੰਤ ਹੋ ਗਏ ਜੋ ਤੁਰ ਮਿਲੇ ਨਾ ਵਿਛੜੇ ਉਹ ਗਿੜੇ ਅੰਦਰ ਤੁਰ ਜਾ ਕੇ ਅੰਦਰ ਬਿਸੇ ਨੇ ਆਪਣੇ ਘਰ ਮਿਲੇ ਨੇ ਉਹ ਵਿਛੜ ਕੇ ਵੀ ਜਾਣਗੇ ਨਾ ਵਿਛੜੇ ਕਾਬੂ ਹੂੰ ਨਾ ਵਿਛੜਣਾ ਕਾਬੂ ਹੂੰ ਕਹੋ ਤੇ ਗੋਮਨ ਹਮ ਹੋ ਗਿਆ ਜੋ ਤੁਰ ਮਿਲੇ ਨਾ ਵਿਛੜੇ ਕਾਬੂ ਕਿ ਆਪ ਮੇਲੇ ਕਰਤਾ ਨੇ ਕਰਤਾ ਨੇ ਮੇਲੇ ਹੁੰਦਾ ਗੁਰਤਾ ਉਹਦੇ ਭਾਣੇ ਨਾਲ ਹੁਕਮ ਨਾਲ ਮਿਲੇ ਨੇ ਹੁਣ ਕਿਵੇਂ ਵਿਛੜ ਜਾਣਗੇ ਜਦ ਆਪਣੇ ਭਾਣੇ ਚ ਮਿਲਦਾ ਨਾ ਆਪਣੇ ਭਾਣੇ ਵੀ ਮਰਦਾ ਹੈ ਆਪਣੇ ਭਾਣੇ ਜਾਂ ਮਰਦਾ ਜਾਂ ਕਿਸਮਤ ਪੈ ਜਾਂਦੀ ਹੈ ਜਿਵੇਂ ਉਹ ਦਰੋਗਤੀ ਮਿਲੀ ਸੀ ਲੋਕੀ ਨੇ ਕਿਹਾ ਤਾਂ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਕਬੀਰ ਕਹਿੰਦਾ ਕਾਣੂ ਪਰੇ ਤੇ ਸਿਮਰੀਏ ਤੈਸੇ ਸਿਮਰੋ ਨਿਤ ਜਿਹੜਾ ਕਾਣ ਪਰੇ ਤੇ ਸਿਮਰਦਾ ਹੈ ਉਹ ਤਰੀਕੇ ਨਾਲ ਲਗਾਤਾਰ ਤੇ ਹਰ ਵਕਤ ਸਿਮਰੇ ਤਰ੍ਹਾਂ ਸਿਮਰੇ ਉਹ ਵਸਤਾ ਤੋਂ ਛੁੱਟਣਾ ਨਹੀਂ ਫਿਰ ਸਿਮਰਨ ਠੀਕਾ है ਵਰਡ ਆਪਾਂ ਪਹਿਲਾਂ ਕਰਦੇ ਸੀ ਆਨੰਦ ਜਿਆਦਾ ਲਿਖਿਆ ਹੋਇਆ ਆਨੰਦ ਘੱਟ ਲਿਖਿਆ ਹੋਇਆ ਟਿੱਪੀ ਨਾਲ ਹਾਂਜੀ ਨਹੀਂ ਵੈਸੇ ਵੀ ਸਾਰੇ ਬਾਣੀ 'ਚ ਚਾਹੇ ਔਕੜ ਨਾਲ ਆਨੰਦ ਚਾਹੇ ਮੁਕਤਾ ਹੈਗਾ ਜੇ ਟਿੱਪੀ ਘੱਟ ਜਗ੍ਹਾ ਲੱਗੀ ਹੈ ਬਿਨਾਂ ਟਿੱਪੀ ਤੋਂ ਵੱਧ ਜਗ੍ਹਾ ਲਿਖਿਆ ਹੋਇਆ ਇਹਨੂੰ ਪਤਾ ਇਹ ਇਹਨਾਂ ਨੇ ਕੁਝ ਜਗ੍ਹਾ ਛਾਪੇ ਚਲਾਤੀਆਂ ਕੁਝ ਜਗ੍ਹਾ ਛੱਡਤੀਆਂ ਉਹ ਸਾਰਾ ਟਿੱਪੀਆਂ ਪੂਰੀਆਂ ਨਾ ਹੋ ਰਬਿੰਦੀ ਦਾ ਟਿੱਪੀ ਇਹਦਾ ਲਵਾਜ ਨਹੀਂ ਸੀ ਪੈਰਾਂ ਦੇ ਖਰਾ ਦਾ ਲਵਾਜ ਸੀ ਉਹ ਸਮਾਂ ਹਟਾਤੇ ਇਹ ਲਾਤੀ ਹਾਂਜੀ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੁੱਖ ਨਿਵਾਰੇ ਹਰ ਸੁਖ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਅੰਤਰ ਸ਼ਬਦ ਸ਼ਬਦ ਤਾਂ ਅੰਦਰ ਰਵਿਆ ਹੋਇਆ ਸ਼ਬਦ ਤਾਂ ਸ਼ਬਦ ਰਵਿਆ ਹੋਇਆ ਉਹ ਰਵਿਆ ਹੋਇਆ ਜੋ ਤੇ ਵਿਚੇ ਰਵਿਆ ਹੋਇਆ ਜੋ ਤੇ ਬਾਹਰ ਤਾਂ ਨਹੀਂ ਜਿਹੜਾ ਪਾਣੀ ਦੇ ਲਹਿਰ ਹੁੰਦੀ ਹੈ ਪਾਣੀ ਦੇ ਵਿੱਚ ਲਹਿਰ ਸਮਾਈ ਹੋਈ ਹੁੰਦੀ ਹੈ ਵਿਚੇ ਹੁੰਦੀ ਹੈ ਲਹਿਰ ਪਾਣੀ ਦੇ ਬਾਹਰ ਤਾਂ ਲਹਿਰ ਜਾਂਦੀ ਉਹਦੀ ਇਹੀ ਗੁਰਦੇਵ ਦੀ ਪ੍ਰਾਪਤੀ ਹੈ ਸਗਲੇ ਦੁੱਖ ਨਿਵਾਰੇ ਸਾਰੇ ਦੁੱਖ ਦੂਰ ਹੋ ਗਏ ਖਬਦਾ ਗਿਆਨ ਹੈ ਜੇ ਅੰਦਰ ਰੱਬ ਜੀ ਦੇ ਅੱਛਾ ਇਹ ਮਨ ਇੱਕ ਹੋ ਜਾਂਦਾ ਹੈ ਹੀ ਹੈ ਹੋਰ ਗੁਰ ਕੋਈ ਨਿਸ਼ਾਨੀ ਨਹੀਂ ਹੈ ਗਿਆਨ ਦੀ ਪ੍ਰਾਪਤੀ ਹੀ ਸਤਗੁਰ ਗੁਰਦੇਵ ਦੀ ਪ੍ਰਾਪਤੀ ਹੈ ਇੱਕ ਹੋ ਜਾਂ ਜਾਂਦਾ ਹੈ ਫਿਰ ਇੱਕ ਹੋ ਗਿਆ ਇਹ ਪਹਿਲਾਂ ਵੀ ਇੱਕ ਹੋਈਏ ਰਹੇ ਦੀ ਇਹ ਬਾਹਰ ਤਰਕੁੜੀ ਜਾ ਕੇ ਮਾਇਆ ਦੀ ਭੁੱਖ ਮਰ ਜਾਂਦੀ ਹੈ ਫਿਰ ਇੱਕ ਹੋ ਜਾਂਦਾ ਹੈ ਕੋਈ ਕੋਈ ਪਹਿਨਾ ਹੈ ਕੋਈ ਫੇਰ ਹੈ ਦੋਰੀ ਹੈਗੇ ਕਹਿਣ ਸੌਣ ਕੋ ਦੂਜਾ ਹੈ ਕਹਿਣ ਸੌਣ ਕੋ ਦੂਜਾ ਕੋਈ ਨਹੀਂ ਹਣੇ ਚੰਦੋਂ ਦੇ ਦੇ ਦੂਰੋਂ ਕੇ ਮਾਇਆ ਕਰਕੇ ਦੁੱਖ ਨੇ ਨਾ ਠੀਕ ਹੈ ਜੀ ਆ ਕਿਉਂ ਨਹੀਂ ਹੋਇਆ ਕਿਉਂ ਹੋਇਆ ਇਹ ਦੁੱਖ ਦੁਬਾਰੇ ਹਰ ਸੁਖਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰਤਾਰੇ ਹਰ ਜਿਹੜਾ ਸੁਖਦਾਤਾ ਸਦਾ ਸਲਾਹੀ ਸਦੇ ਬੱਦ ਦੇ ਅੰਦਰ ਇਹਨੂੰ ਧਾਰ ਕੇ ਰੱਖੋ ਅੰਦਰ ਧਾਰਨ ਕਰਨਾ ਸੀ ਗੱਲ ਦੇ ਵਿੱਚ ਵਾਲਾ ਮਾਲਾ ਹੀ ਗੱਲ ਦੇ ਵਿੱਚ ਜਿਹੜੀ ਮਾਲਾ ਪਾਉਂਦੇ ਗੱਲ ਫਰਹਾ ਉਹਦਾ ਗੱਲ ਘੁੱਟ ਕੇ ਮਾਰ ਦੂ ਕੋਈ ਆਹੀ ਮਾਲ ਹੈ ਦਾ ਜਿਹੜਾ ਗਿਆਨ ਹੈ ਮਾਲਾ ਵਾਂਗੂ ਦੇਖੋ ਨਾ ਲਿਖ ਰਹੇ ਨੇ ਮਾਲਾ ਹੀ ਤਾਂ ਰਹੀ ਹੈ ਜਿਵੇਂ ਆ ਚੱਲਦੀ ਹੈ ਸਾਖੀ ਚੱਲ ਰਹੀ ਹੈ ਜਿਵੇਂ ਲੜੀ ਚੱਲ ਰਹੀ ਹੈ ਬਾੜ ਦੀ ਕਿਹਦਾ ਮਾਲਾ ਹੈ ਠੀਕ ਹੈ ਜੀ ਮਨਮੁਖ ਤਨ ਕੀ ਵਕੀਲੀ ਕੀ ਕਰੇ ਜੇ ਸੱਚੇ ਸ਼ਬਦ ਸਵਾਰੇ ਉਹਨਾਂ ਕੀ ਆਪ ਪਤ ਰਖਸੀ ਮੇਰਾ ਪਿਆਰਾ ਸ਼ਰਣਾਗਤ ਪਏ ਗੁਰਦੁਆਰੇ ਮਨਮੁਖ ਤਨ ਕੀ ਕੀ ਕਰੇ ਉਹ ਮਨਮੁਖਾਂ ਨੇ ਹੁਣ ਅਜਾ ਜਨਾ ਕੀ ਕਰਨ ਲੈ ਵਕੀਲੀ ਹੁੰਦੀ ਵਿਰੋਧ ਕਰਨ ਕੋ ਜਿੱਟਾਂ ਕਰਦੀ ਹੈ ਦੀ ਗੱਲ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੀ ਵਕੀਲੀ ਹੁੰਦੀ ਆ ਬਖੇੜਾ ਪਾਉਣ ਇਹ ਠੀਕ ਨਹੀਂ ਜੀ ਇਹ ਤਾਂ ਹੀ ਲੀਜੇ ਤਾਂ ਉਹ ਨਹੀਂ ਜੀ ਮਨੁੱਖ ਕਿੱਧਰ ਵਕੀਲੀ ਕਰ ਲੂਗਾ ਜੇ ਸੱਚੇ ਸ਼ਬਦ ਸਵਾਰੇ ਜਿਨ੍ਹਾਂ ਨੂੰ ਸੱਚੇ ਸ਼ਬਦ ਨੇ ਸਵਾਰ ਦਿੱਤਾ ਉਹਨਾਂ ਦੀ ਮਨਮੁੱਖੀ ਉਹਨਾਂ ਦੀ ਗੱਲ ਨੂੰ ਰੱਦ ਕਰ ਦੂਗਾ ਕਿਵੇਂ ਕਰ ਰੱਦ ਚੱਖ ਮਾਰਦਾ ਰਹੂਗਾ ਚੱਖ ਮਾਰੀ ਜਾਵੇ ਉਹਨਾਂ ਦੀ ਆਪ ਪੱਤ ਰੱਖੀ ਮੇਰਾ ਪਿਆਰਾ ਉਹਨਾਂ ਦੀ ਪੱਤਾ ਆਪ ਮੇਰਾ ਪਿਆਰਾ ਰੱਖਦਾ ਉਹਨਾਂ ਦੇ ਮੂੰਹ ਤੋਂ ਗੱਲ غلط ਗੱਲ ਨਿਕਲਣ ਨਹੀਂ ਦਿੱਦਾ ਨਿਕਲਦੀ ਨਿਕਲਦੀ ਨੂੰ ਰੋਕ ਦਿੰਦਾ ਜੇ ਨਿਕਲ ਲੱਗ ਜਾ ਕੋذਰ ਤੇ ਰੋਕ ਦਿੰਦਾ ਵੀ ਇਹ ਨਹੀਂ ਆਹ ਉਹਨਾਂ ਨੇ ਮੂੰਹ ਤੋਂ ਗੱਲ ਨਿਕਲਣ ਨਹੀਂ ਦਿੱਤਾ ਮੇਰਾ ਪਿਆਰਾ ਸਰਨਾਟਕ ਪਏ ਗੁਰਦੁਆਰੇ ਕਿਉਂਕਿ ਉਹਦੇ ਉਹ ਤੇ ਟੈ ਪਏ ਹੁੰਦੇ ਨੇ ਤਾਂ ਨਾਲ ਤਾਂ ਕੋਈ ਗੱਲੇ ਨਹੀਂ ਕਰਦੇ ਉਹਦਾ ਜਿਹ ਹੈਗਾ ਬਲਾਉਂਦਾ ਹੋ ਜਾਂ ਬੋਲਦੇ ਉਹ ਤਾਂ ਉਹਦੀ ਛੜ ਕੇ ਬੋਲਦੇ ਨੇ ਉਹ ਕਹਿੰਦੇ ਨਹੀਂ ਮੈਂ ਕਹਾਂਨਾ ਉਹ ਤਾਂ ਕਾਇਨਰ ਪਰ ਗੁਰਬਾਨੀ ਕਹਿੰਦੀ ਹੈ ਮੇਰੇ ਸਮਝਣ ਦੀ ਗਲਤੀ ਹੋ ਸਕਦੀ ਆ ਹੋ ਗਈ ਹੋ ਆਪਾਂ ਜੇ ਹੋ ਗਈ ਤਾਂ ਸੁਧਾਰ ਲੈਂਦੇ ਆ ਸੁਧਾਰ ਵੀ ਲਈਦੀ ਹੈ ਜੇ ਹੋਜੇ ਆਦਮੀ ਤਾਂ ਗਲਤੀਆਂ ਦਾ ਪੁੱਤ ਲੈ ਹਾਂਜੀ ਨਾਨਕ ਗੁਰਮੁਖੀ ਸੇ ਸੁਹੇਲੇ ਮੁਖ ਊਜਲ ਦਰਬਾਰੇ ਜਿਹੜਾ ਜਿਹੜੇ ਹੁੰਦੇ ਨੇ ਉਹੀ ਸੁਹੇਲੇ ਦੇ ਉਹ ਹੀ ਸੁਖੀ ਰਸਮਦਾਰ ਚ ਉਹ ਆਪਣੇ ਝੂਮੇ ਲੈਂਦੇ ਹੀ ਨਹੀਂ ਕੁਝ ਉਹ ਝੂਮੇ ਲੈਣ ਵੀ ਕਿਉਂ ਝੂਟਕਾ ਤੇ ਬੋਲਣਾ ਉਹ ਜੋ ਬੁਲਾਵੋ ਤੇ ਦਰਦਲਾਸ ਬੋਲ ਲੈ ਗੱਲ ਖਤਮ ਹੋਈ ਉਹ ਜੀਵੇ ਹੋ ਕੇ ਰਹਿੰਦੇ ਨੇ ਦਾਸ ਬਣ ਕੇ ਰਹਿੰਦੇ ਨੇ ਦਾਸ ਵੇਲੇ ਨੇ ਉਹ ਖੂਹ ਦਰਬਾਰੇ ਹਾਂ ਕਿਆ ਦਰਵਾਜ਼ੇ ਵਿੱਚ ਉਹਨਾਂ ਦਾ ਖੂਹ ਚਲ ਉਹਤੇ ਉਹਤੇ ਉਹਨਾਂ ਦੀ ਜਿਹੜੀ ਇੱਜ਼ਤ ਆ ਸਾਥੀ ਘਰ ਉਹਨਾਂ ਦੀ ਇੱਜ਼ਤ ਆ ਦੂਜਿਆਂ ਨੂੰ ਨਹੀਂ ਕੋਈ ਪੁੱਛਦਾ ਪਰ ਐਤੇ ਉਹਨਾਂ ਨੂੰ ਵੀ ਕੋਈ ਪੁੱਛਦਾ ਪੁੱਛੇ ਨਾ ਪੁੱਛੇ ਉਹਨਾਂ ਨੂੰ ਕੋਈ ਲੋੜ ਨਹੀਂ ਇੱਥੇ ਕੋਈ ਪੁੱਛੇ ਐਤੇ ਉਹਨਾਂ ਦੀ ਪੁੱਛੋਣੀਆਂ ਨਹੀਂ ਹੁੰਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਗੁਰਮੁਖੀ 6 ਇਹਦਾ ਮਤਲਬ ਗੁਰਮੁਖੀ ਪੌੜੀ ਇਸਤਰੀ ਪੁਰਖੇ ਬਹੁਪ੍ਰੀਤ ਮਿਲ ਮੂੰ ਵਧਾਇਆ ਪੁੱਤਰ ਕਲਤਰ ਨਿਤ ਵੇਖਿਆ ਵਿਗਸੈ ਮੋਹ ਆਇਆ ਆ ਇੱਥੀ ਬੁਰਖਾ ਬੋ ਪ੍ਰੀਤ ਇਸ ਤਰ੍ਹਾਂ ਤੁਰਖ ਜੇ ਬਹੁਤ ਪ੍ਰੀਤ ਆਪਸ ਵਿੱਚ ਹੀ ਹੈ ਉਹ ਵੀ ਜੀ ਇਹ ਦੁਨੀਆ ਵਿੱਚ ਪਰ ਕੀ ਹੈ ਇਹਨਾਂ ਨੇ ਮੇਲ ਦੇ ਮੋਹ ਬਣਾ ਲਿਆ ਮੋਹ ਨਹੀਂ ਵਧਾਉਣਾ ਪ੍ਰੇਮ ਵਧਾਉਣਾ ਪ੍ਰੇਮ ਜੇ ਵਧਾਉਂਦੇ ਤਾਂ ਸਾਰਿਆਂ ਨਾਲੇ ਹੋ ਜਾਂਦਾ ਪ੍ਰੇਮ ਉਹ ਦੋਹਾ ਜੇ ਰਹਿ ਜਾਂਦਾ ਫਿਰ ਉਹ ਪ੍ਰੇਮ ਦੇ ਰਸੇ ਜਿਹੜੇ ਢੱਕਾ ਪਾਦਾ ਕਰਦਾ ਮੋਹ ਦਾ ਮਾਇਆ ਨਰ 3000 ਦਾ ਪ੍ਰੀਤ ਵੀ ਅਜੋਤ ਨਾਲ ਉਹ ਵਧਾਇਆ ਪ੍ਰੀਤ ਜਿਹੜੀ ਹੈ ਉਹ ਮੋਹ ਦੇ ਵਿੱਚ ਬਦਲ ਗਈ ਉਹ ਜਿਹਨੂੰ ਪ੍ਰੀਤ ਕਹਿੰਦੇ ਆ ਅਸਲ ਦੇ ਵਿੱਚ ਮੋਹ ਹੈ ਉਹ ਵਧਾਇਆ ਠੀਕ ਹੈ ਪ੍ਰੀਤ ਨਹੀਂ ਹੈ ਹੂੰ ਪ੍ਰੀਤ ਹੈ ਟੁੱਟੀ-ਟੇਕੀ ਪ੍ਰੀਤ ਜਗਤ ਭਰੇ ਉਹ ਸੱਚੀ ਪ੍ਰੀਤ ਨਹੀਂ ਪ੍ਰੇਤ ਪ੍ਰੇਸ਼ ਕਰ ਭਾਗੀ ਨਹੀਂ ਆਇਆ ਫਿਰ ਹਾਂ ਇਹ ਲੱਗਦਾ ਇਸ ਤੀਰੂ ਦੇ ਰੋਜ਼ ਦੇਖਦਾ ਫਿਰ ਬਿਰਸਾ ਖੁਸ਼ ਹੁੰਦਾ ਮੋਹ ਮਾਇਆ ਇਹ ਮਾਇਆ ਇਹ ਉਹ ਜਰੂਰ ਮਾਇਆ ਕਹਿੰਦੇ ਨੇ ਜੀ ਜਿਹੜਾ ਜਿਹੜਾ ਸਰੀਰ ਕਰਕੇ ਦੇਖ ਕੇ ਖੁਸ਼ ਹੁੰਦਾ ਇਸ ਨੂੰ ਉਹ ਮਾਇਆ ਕਹਿੰਦੇ ਨੇ ਉਹ ਕੋ ਮਾਇਆ ਕੁਝ ਨਹੀਂ ਸਰੀਰ ਭਾਇਆ ਹੈ ਇਹਦਾ ਵੋਹ ਹੈ ਕੋ ਸਕੇ ਨਾ ਛਡਾਇਆ ਆ ਜੇ ਵਰਦੇ ਪਾਉਂਦਾ ਉਹਨਾਂ ਨੂੰ ਖੜਾਉਂਦਾ ਉਹਨਾਂ ਵਾਸਤੇ ਢੰਡ ਵੀ ਲੈ ਕੇ ਆਉਂਦਾ ਚੋਰੀ ਵੀ ਚੜਾ ਕੇ ਵੀ ਲੈਂਦਾ ਜਾਂ ਚੋਰੀ ਵੀ ਕਰਦੀ ਪੈ ਜਵੇ ਉਹਨਾਂ ਦੇ ਪਾਉਂਦਾ ਸੰਤ ਕੀ ਹੁੰਦਾ ਹੈ ਇਹਦਾ ਹੋਵੇ vair virodh ਉਹ ਉਹ ਜਿਨ੍ਹਾਂ ਨੂੰ ਜਰਾਉਂਦਾ ਉਹਨਾਂ ਨਾਲ ਵੀ ਵਿਰੋਧ ਪੈਰ ਹੋ ਜਾਂਦਾ ਥਲੇ ਵਿੱਚ ਅਸੀਂ ਜਿੱਕੇ ਦਰਨ ਕਿਤੇ ਜਾ ਕੇ ਨੂੰ ਖੜਾਉਂਦਾ ਉਹ ਵੀ ਮੁਰਾਏ ਸਮਝਣ ਲੱਗ ਜਾਂਦਾ ਚੋਰੀਆਂ ਕਰਕੇ ਖੜਾਇਆ ਸਾਧੂ ਰਾਣ ਵਿਰੋਧ ਕੋਸਾ ਗਾਣਾ ਜਿਹੜਾ ਸੱਚਖੰਡ ਤੋਂ ਸਾਖੀ ਹੈ ਨਾ ਜਿਹੜੀ ਬਾਲਮੀ ਕਾਲੀ ਉਦੋਂ ਦਾ ਇਸ਼ਾਰਾ ਹੈ ਉਹ ਕਿ ਆ ਨਾ ਵੀ ਭਾਈ ਤੂੰ ਲੈ ਕੇ ਨਾ ਜਾਣਾ ਉਹਨਾਂ ਦੇ ਵਾਸਤੇ ਚੋਰੀ ਕਰਕੇ ਉਹ ਪੁੱਛ ਲੈ ਤੇਰਾ ਹਿੱਸਾ ਵੀ ਲੈਣਗੇ ਆਂਤੇ ਰਹਿਣੇ ਜਿਹੜਾ ਅੜੀ ਮੜਨਾ ਦੀ ਲੋੜ ਵੀ ਅਸੀਂ ਵੀ ਖਾਦੇ ਰਹੇ ਆ ਇਹਨੂੰ ਛੋੜ ਕਮਾ ਕੇ ਲੈ ਆਉਂਦਾ ਕੋਈ ਨਹੀਂ ਛਡਾ ਸਕਦਾ ਅੰਤ ਵੇਲੇ ਇਹਨੂੰ ਕਿਹੜਾ ਨਸਾ ਹੀ ਢੂੜ ਨਾਨਕ ਨਾਨਕ ਬਿਨ ਨਾਮ ਹੈ ਤ੍ਰਿਗਮੋਹ ਜਿੱਤ ਲੱਗ ਦੁਖ ਪਾਇਆ ਨਾ ਨਾਮ ਦੇ ਨਾਮ ਨਾਲ ਮੋਹ ਵੀ ਹੋਵੇ ਉਹ ਵੀ ਚੰਗਾ। ਜਿਹੜੇ ਦਾ ਨਾਮ ਹੈ ਤ੍ਰਿਕਮੋਹ ਉਹ ਜੇ ਜਿਹੜੇ ਭਗਤਾਂ ਦਾ ਆਪਸ ਵਿੱਚ ਪਿਆਰ ਹੁੰਦਾ ਜੇ ਉਹ ਵੀ ਉਹਨੂੰ ਕਹਿ ਦਈਏ ਉਹ ਵੀ ਨਹੀਂ ਬੁਰਾ ਹੈਗਾ। ਉਹਨਾਂ ਨੂੰ ਵੀ ਤਾਂ ਮੋਹ ਹੁੰਦਾ ਹੀ ਆ। ਉਹ ਬੁਰਾ ਨਹੀਂ ਹੈ। ਨਾਮ ਤੇ ਬਿਨਾਂ ਜਿਹੜਾ ਮੋਹ ਹੈ ਉਹ ਬੁਰਾ ਹੈ। ਮੇਰੇ ਨਾਮ ਦੇ ਤ੍ਰਿਕਮੋਹ ਨਾਬ ਤੋਂ ਬਿਨਾਂ ਵਾਲਾ ਮੋਹ ਤਰੇਗਾ। ਜਿੱਥੇ ਲੱਗ ਦੁੱਖ ਪਾਇਆ ਜਿਹੜੇ ਮੋੜੋਂ ਦੁੱਖ ਮਿਲੇ ਉਹ ਉਹ ਭੈਣਾ ਜੀ ਜੇ ਸੁੱਖ ਮਿਲੇ ਉਹ ਗੋਬਰੀ ਬੈਠਾ। ਨੌਵੇਂ ਪਾਸ਼ਾ ਨਾਲ ਸਤੀ ਦਾਸ ਨਾਲ ਸਤੀ ਦਾਸ ਭਾਈ ਦਿਆਲੇ ਦਾ ਬੋਲ ਸੀ ਕੋਈ ਕਹਿ ਦੇ ਉਹ ਕਹਿੰਦੇ ਛੱਡ ਕੇ ਨਹੀਂ ਜਾਂਦੇ। ਇਹਨਾਂ ਬਾਬਿੰਦਾਂ ਦੁੱਖੇ ਹੋਵੇ ਪਰ ਉਹ ਸੁੱਖ ਮਿਲੇ ਉਹਨਾਂ ਨੂੰ। ਠੀਕ ਹੈ ਜੀ। ਇੱਥੇ 32ਵੀਂ ਪੌੜੀ ਦੀ ਸਮਾਪਤੀ ਹੈ ਜੀ।